ਲਾਜ ਮਰੰਤੀ ਮਰ ਗਈ ਘੁੰਗਟ ਖੋਲ ਚੱਲੀ ਸਾਸ دیਵਾਨੀ ਬਾਵਰੀ ਸਿਰਕੇ ਸੰਕਟ ਢਲੀ ਲਾਜ ਬੁਲਤੀ ਵਰ ਗਈ ਜਿਹ ਪਹਿਲੇ ਲਾਜ ਲੱਗਦੀ ਸੀ ਉਹ ਸ਼ਰਮ ਹੁੰਦੀ ਸੀ ਹਾਂਜੀ ਜੇ ਜਨਾਹ ਪੁੱਛਣ ਤੋਂ ਜੇ ਤੁਹਾਡੇ ਨਾਲ ਗੱਲ ਤੋਂ ਹੂੰ ਉਡੀ ਰਹੀ ਹਾਂ ਉਹਨਾਂ ਕੋਲ ਗੜ੍ਹ ਹੋਲ ਤਾ ਮੈਨੇ ਕੋਣ ਕੀ ਐ ਉੱਠ ਲੋ ਉਹਨੇ ਕੋਣ ਕੀ ਐ ਦੱਸ ਦੋ ਹੂੰ ਹੂੰ ਅਰਦਾ ਕੋਈ ਨਹੀਂ ਜਿਨ ਜੀਅਨ ਮੇਂ ਬਾਹਰ ਖੋ ਕੇ ਜਿ ਨਹੀਂ ਗਿਆ ਤਾਂ ਉਹ ਫਿਰੇਗਾ ਤੋ ਹੂੰ ਕਾਜ਼ ਦੇਵਾਲ ਦੀ ਬਾਵਰੀ ਬੋਟਾ ਲਈ ਸਾਸਾ ਅਚਾਰ ਜੀ ਜਵਾਨੀ ਇਹ ਬਾਵਰੀ ਹੈ ਤੇ ਜੇ ਇਹ ਦੀ ਬੋਤਾ ਤੇ ਸੰਤਾਂ ਸ਼ੰਕਾ ਟਲ ਦੀ ਤੇ ਇਹ ਟਲ ਸਮਝ ਆ ਗਈ ਬਹੁਤ ਸਦੀ ਉਹ ਦੀ ਠੀਕ ਹੈ ਜੀ ਪ੍ਰੇਮ ਬੁਲਾਈ ਰਲੀ ਸਿਉ ਮਨ ਮੈਂ ਸ਼ਬਦ ਆਨੰਦ ਲਾਲ ਰਤੀ ਲਾਲੀ ਭਈ ਗੁਰਮੁਖ ਭਈ ਨਿਚੰਦ ਆਹ ਅਰੇ ਬੁਲਾਈ ਅਰੇ ਸਿਉ ਪ੍ਰੇਮ ਬੁਲਾਈ ਢੜੀ ਉਹ ਨਾਰਾਇਣ ਰਲੀ ਸਿਉ ਇਤ ਬੁਲਾਈ ਉਹਦੇ ਨਾਲ ਰਲ ਗਈ ਰਬੇ ਸ਼ਬਦ ਅਮੰਤ ਬੁੱਧ ਦੇ ਵਿੱਚ ਅਨੂਦ ਸ਼ਬਦ ਜਿਹੜਾ ਸੀਗਾ ਉਹ ਪਰਲਟ ਹੋ ਗਿਆ ਲਖਾਂ ਰੁਪਈ ਲਾਲੀ ਪਈ ਨਾਲ ਰੱਤੇ ਦੀ ਰੁਣਤ ਚਲੇ ਗਿਆ ਲੋਕ ਲਾਲੀ ਹੋ ਗਈ ਹਨ ਜੀ ਲਾਲੀ ਕੋਈ ਗੁਰਬੁਖੀ ਪਹਿਰਿ ਚੰਦ ਗੁਰਬੁਖੀ ਸਹੀ ਜਰੀ ਚੰਦ ਇੰਤਾਰ ਰਹਿਸ ਤੂੰ ਤਬ ਮੁਕਤ ਹੋਗੀ ਠੀਕ ਹੈ ਜੀ